छात्रक चित्त सुचित्त सुसाजन चाहिए जिस संगी लागे प्राण तसे को आही है, है था, था हर वक्त नाम वास्ते वक्त नाम ना जुड़ेया होया हर वक्त जागृत जो है जड़ा है छात्रक ਜਿਹੜਾ ਚੱਤੇ ਕਿਤਨੀ ਹੈ ਉਹ ছাত্র ਨਹੀਂ ਹੈ ਪਹਿਲਾਂ ਤਾਂ ছাত্রਗੇ ਨਹੀਂ ਮੰਨਿਆ ਆ ਸੱਚਤਾਲੀ ছাত্র ਪੂਰੀ ਕਰਦੇ ਹੈ ਚਲੋ ਕਰਦਾ ਪੂਰੀ ਇਹ ਫੁਰਸਤ ਕਰਦਾ ਜਦੋਂ ਉਹਨੂੰ ਸਮਝ ਆ ਜਾਂਦੀ ਹੈ ਗਿਆਨ ਚੋਂ ਇਹ ਜਿਹਨੂੰ ਤੁਸੀਂ ਗੁਰਦੇ ਬਣਾਓ ਤੇ ਨਾਲ ਚੱਲਣ ਜਿਹੜੇ ਚਲਦੇ ਨਾਲ ਜਿਹੜੀ ਚੱਲਦਾ ਉਹ ਗੁਰਦੇਵ ਕਾ ਦਾ ਗੁਰ ਮੇਰਾ ਸੰਦ ਸਦਾ ਹਾਲੇ ਉਹ ਗੁਰ ਇਹ ਗੱਲ ਖੋਲਣੇ ਨਹੀਂ ਜਾਂਦਾ ਇਹ ਬੰਤ ਇਹ ਤਾਂ ਫਿਰਦਾ ਹੋ ਉਹ ਪਿਛਲਾ ਗੁਰਵਾਣੀ ਕਰਨੀ ਚਾਹੁੰਦਾ ਕਰਦਾ ਜੋ ਗੁਰਵਾਣੀ ਵਿੱਚ ਹੀ ਹੋਈ ਗੱਲ ਅੱਛਾ ਚਾਤ੍ਰਿਕ ਚਿੱਤ ਸੁਚਿੱਤ ਕੌਣ ਜੀ ਹੁਣ ਕਿਤੇ ਸੱਚਾ ਜਿਹੜਾ ਉਹੀ ਸਾਜਨ ਅੱਛਾ ਕਿ ਸੇ ਹੋਰ ਨਾਉਣ ਸੱਜਣ ਨਹੀਂ ਬਣਾਉਣਾ ਸੀ ਉਹਨੂੰ ਸੱਜਣ ਸਮਝ ਕੇ ਉਹਦੇ ਨਾਲ ਚੱਲਣਾ ਹੈ ਜੀ ਹਾਂ ਆਪਣੇ ਮੂੜ ਨੂੰ ਸੱਜਣ ਬਣਾਉਣਾ ਹੈ ਮੂੜ ਨੂੰ ਸਚਿਤ ਕਰਨਾ ਹੈ ਚੇਤਨ ਕਰਨਾ ਉਹਨੂੰ ਪਹਿਲਾਂ ਨਹੀਂ ਚੇਤਨਤਾ ਹੋ ਹੈ ਹੀ ਚੇਤਨ ਉਹ ਵੀ ਨਹੀਂ ਇਹ ਵੀ ਨਹੀਂ ਜਿੰਨਾ ਚਿਰ ਗੁਰਬਾਨੀ ਨਹੀਂ ਸੁਣਦਾ ਚੇਤਨ ਕਿੱਥੋਂ ਹੋ ਜਾਣਾ ਗੁਰਬਾਨੀ ਉਹ ਉਹਨਾਂ ਦੇ ਚੇਤਨ ਜਿੰਨਾ ਕੋ ਸਾਚ ਲਾਉਣੇ ਵਾਲਾ ਮਾਇਆ ਕਰ ਮਾਇਆ ਦੇ ਪ੍ਰਤੀ ਚੇਤਨ ਸ਼ਬਦ ਪ੍ਰਤੀ ਚੇਤਨ ਨਹੀਂ ਹੈ ਉਹ ਕੰਮ ਪ੍ਰਤੀਜੇ ਤਾਂ ਨਹੀਂ ਹੋ ਜੇ ਹੈ ਉਹ ਅੱਛਾ ਜੀ ਉਹ ਗੁਰਬਾਣੀ ਸੁਣ ਕੇ ਹੋ ਜਾਏਗਾ ਹਾਂ ਜੀ ਆ ਬਾਣੀ ਸੁਣ ਕੇ ਹੋ ਜਾਊਗਾ ਠੀਕ ਹੈ ਜੀ ਜਿਸ ਸੰਗੀ ਲਾਗੇ ਪ੍ਰਾਣ ਤਿਸੈ ਕੋ ਆਹੀ ਹੈ ਆ ਜਿਹਦੇ ਨਾਲ ਸਾਡੇ ਪ੍ਰਾਣ ਜੁੜੇ ਹੋਣ ਜਿਵੇਂ ਹੁਣ ਸਾਡੇ ਉਤੇ ਜਿਆਦਾ ਵੱਡਾ ਸੱਜਣ ਕੌਣ ਹੋਊ ਇਹ ਵੀ ਉਸੇ ਗੱਲ ਤੇ ਜੋੜ ਦਿੱਤਾ ਹੈ ਬਾਲ ਦਾ ਜਿਹੜਾ ਗੁਰਦੇ ਬਣਾਉਂਦੇ ਉਹਨੂੰ ਹੈ ਠੀਕ ਹੈ ਜੀ ਜਿਸ ਸੰਗੀ ਲੱਗੇ ਪ੍ਰਾਣ ਉਹਦੇ ਨਾਲ ਸਾਡੇ ਪ੍ਰਾਣ ਫਿਰ ਲਿਖਿਆ ਜੀ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਆਧਾਰ ਤੂੰ ਸੱਜਣ ਕੌਣ ਹੋ ਸਕਦਾ ਕਿੱਥੋਂ ਮਿਲੂਗਾ ਨੇ ਜਿਹੜੇ ਬਣਾਈ ਫਿਰਦੇ ਨੇ ਸੇ ਉਹਨੂੰ ਛੱਡਣ ਵਾਸਤੇ ਜ਼ਰੂਰਤ ਆ ਹੈ ਗੁਰੂ ਬਣਾਈ ਬੈਠੇ ਨੇ ਕੋਈ ਬਣੇ ਬੈਠੇ ਨੇ। ਭਗਤਾਂ ਨੇ ਤਾਂ ਹੀ ਨਬਾਇਆ ਵਾਹਣ ਗੁਰੂ ਹੈ ਜਗਤ ਦਾ ਭਗਤਾਂ ਦਾ ਕੋਲ ਨਹੀਂ। ਭਗਤਾਂ ਕੋਲ ਰੇਵ ਨਹੀਂ ਠੀਕ ਹੈ ਜੀ। ਬਨ ਬਨ ਫਿਰ ਉਦਾਸ ਬੂੰਦ ਜਲ ਕਾਰਨੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਹਾਰਨੇ। ਮੰਗਦਾ। ਇਹ ਜੰਗਲ ਫਿਰ ਇਹਨੂੰ ਪਤਾ ਹੀ ਨਹੀਂ ਕਿੱਥੋਂ ਮਿਲੂਗਾ। ਬੂਦ ਜਲਕਾਰ ਨੇ ਇਹ ਜਲਕਾਰ ਨੇ ਨਾਮ ਦੀ ਬੂਦਕਾਰ ਨੇ ਜਨ ਜਿਹੜਾ ਹੈ ਬਣ ਬਣ ਰਹੀ ਘਰਬਾਰ ਜੋ ਬੂਦ ਉਹਦਾ ਹੁੰਦਾ ਹੈ ਘਰ ਹੈ ਫਿਰਦਾ ਬਾੜ ਟੋਲੇ ਕੇ ਪਰੰਪਲਾਈ ਇਹ ਪਰੰਪਲਾਈ ਵਾਲੇ ਇਹ ਦੋਹਾਂ ਫਰਕ ਦੀ ਗੱਲ ਹੈ ਬਾੜ ਜਿਹੜੇ ਗੁਰੂ ਬਣੇ ਫਿਰਦੇ ਨੇ ਪਰੰਪਲਾਉਣੇ ਵਾਲੇ ਨੇ ਪਰਮ ਗਿਆਨੀ ਨੇ ਹੋ ਇਹ ਗੱਲ ਖੁੱਲ੍ਹੇ ਜੀ ਨਹੀਂ ਕਹਣਾ ਚਾਹੁੰਦਾ ਫਿਰ ਤਾਂ ਇਹਨਾਂ ਦਾ ਸਾਰਾ ਸੱਤਿਆ ਨਾਲ ਸੁਣਦਾ ਹਾਂ ਇਹ ਹੁੰਦਾ ਇੱਥੇ ਮਤਲਬ ਹੈ ਵੀ ਇਹ ਗੱਲ ਗਲਤ ਹੈ ਵੀ ਮੈਂ ਕਹਾਂ ਉਹ ਮੇਰੇ ਤੁਸੀਂ ਤੇ ਲਵਣ ਜੋ ਕੋਈ ਮੈਂ ਦੇ ਸਕਦਾ ਅੱਛਾ ਜੀ ਆਪਾਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜੇ ਬੰਨ ਬੰਨ ਫਿਰ ਤਾਂ ਜਿਹੜਾ ਹੋਰ ਵੀ ਜਿਹੜੇ ਬਾਹਰ ਧਰਮ ਜਾਂ ਮਤਾਂ ਟੋਲਦੀਆਂ ਬਾਹਰੋਂ ਮੰਨਦੇ ਨੇ ਬਾਹਰੋਂ ਦਰਸ਼ਨ ਕਰਨ ਦੀ ਗੱਲ ਬੋਲਦੇ ਨੇ ਸਮਝਦੇ ਨੇ ਜਾਂ ਪ੍ਰਚਾਰਦੇ ਨੇ ਉਹਨਾਂ ਨੂੰ ਇਹ ਹੈ ਗੱਲ ਅੱਛਾ ਪਰ ਇਹਨਾਂ ਨੂੰ ਆ ਲੱਗਦਾ ਇਹ ਕਹਿੰਦੇ ਜਿਵੇਂ ਪਪੀਹਾ ਸ਼ਵੰਤੀ ਬੂਨ ਦੀ ਖਾਤਰ ਆਕਾਰ ਸਤੇ ਜੰਗਲ ਜੰਗਲ ਫਿਰਦਾ ਪ੍ਰੂ ਪ੍ਰੂ ਕਰਦਾ ਰਹਿੰਦਾ ਹੈ। ਨਾ ਕੋਈ ਸ਼ਵਤ ਬੂਨ ਹੁੰਦੀ ਹੈ ਨਾ ਕੋਈ ਪਪੀਹਾ ਹੁੰਦਾ ਜਿਹੜਾ ਕਹਿੰਦੇ ਨੇ। ਕੋਈ ਐ ਜਾਨਵਰ ਹੈ ਹੀ ਨਹੀਂ। ਕਲਪਨਿਕ ਗੱਲਾਂ ਨੇ ਸਾਰੇ। ਨਾ ਕੋਈ ਇਹ ਜਾ ਉਹ ਪੱਥਰ ਹੈ ਜਿਹੜਾ ਤਾਂਬੇ ਨੂੰ ਸੋਨਾ ਕਰ ਦਵੇ। ਦੁਨੀਆਂ 'ਚ ਤਾਂਬਾ ਲੋਹਾ ਮਿਲਦਾ ਹੀ ਨਹੀਂ। ਜੇ ਛੋਟਾ ਜਿਹਾ ਵੀ ਕਿਸੇ ਕੋਲ ਹੁੰਦਾ ਦਾ ਸਾਰਾ ਤੰਬਾ ਜਿਹੜਾ ਸੋਨਾ ਹੀ ਬਣ ਜਾਣਾ ਸੀ ਹਾਂ ਸੋਨਾ ਹੀ ਬਣ ਜਾਂਦਾ ਲੋਹਾ ਤਾਂ ਫੇਰ ਦੁਨੀਆਂ 'ਚ ਮਰਦਾ ਹੀ ਨਾ ਜੇ ਪਾਰਸਨਾਉਂ ਦਾ ਕੋਈ ਪੱਥਰ ਹੁੰਦਾ ਉਹ ਨਾਲ ਸਖਤਾ ਤੇ ਲੋਹਣਿੰਗ ਹੋ ਜਾਂਦਾ ਇਹ ਤਿੰਨ ਚੀਜ਼ਾਂ ਚਾਰ ਕਲਪਣਿਸ਼ ਨੇ ਇੱਕ ਪਾਰਸ ਇੱਕ ਸੰਸ ਜਿਹੜਾ ਮੋਤੀ ਚੁਗਦਾ ਇੱਕ ਇਹ ਵਾਪਿਸਾ ਬ੍ਰਹਮ ਭਾਸ਼ਾ ਜੀ ਹਾਂ ਇਹ ਬ੍ਰਹਮ ਵਿਦਿਆ ਦੇ ਵਿੱਚ ਇਹ ਗੱਲਾਂ ਆਈਆਂ ਨੇ ਐਕਚੁਅਲੀ ਮਾਇਆ ਜਿਹੇ ਦੀ ਗੱਲ ਹੁੰਦੀ ਹੋਣੀ ਕੋਈ ਤੇ ਬਨ ਬਨ ਫਿਰਤ ਉਦਾਸ ਬੂੰਜਲ ਕਰਨੇ ਜੇ ਕੋਈ ਬਾਹਰ ਲੱਭਦਾ ਫਿਰਦਾ ਹੈ ਉਹਦੀ ਕੋਈ ਗੁਰਬਾਣੀ ਹਮੇਂ ਨਹੀਂ ਭਰਦੀ ਹਾਂ ਜੀ ਵੀਰ ਜੀ ਜੇ ਮਿਲਿਆ ਹੋਵੇ ਸਬੂਤਾ ਹੋਵੇ ਭਗਤਾਂ ਨੂੰ ਮਿਲਿਆ ਸਬੂਤਾ ਸਾਡੇ ਕੋਲ ਠੀਕ ਹੈ ਜੀ ਹਰ ਹਾਂ ਤਿਉ ਹਰ ਜਨ ਮੰਗੇ ਨਾਮ ਨਾਨਕ ਬਲਹਾਰ ਨੇ ਨਾਨਕ ਦਾ ਮਾਬਲੇ ਆਦਿ ਹਰ ਜਨ ਇਸ ਤਰੀਕੇ ਨਾਲ ਨਾਮ ਮੰਗਦਾ ਉਹ ਤੋਂ ਉਹਦਾ ਪੁਰਾਣਾ ਦਾ ਆਧਾਰ ਹੈ ਪਰ ਇਹ ਪਿਛਲੀ ਤੁਕ ਨਾਲ ਨਹੀਂ ਮਿਲ ਕੇ ਚਲਦੀ ਗੱਲ ਫਿਰ। ਪਿਛਲੀ ਤੁਕ ਨਾਲ ਮਿਲ ਕੇ ਚਲਦੀ ਹੈ। ਇਹਦਾ ਮਤਲਬ ਇਹ ਹੈਗਾ ਵੀ ਮੈਂ ਕਹਿਣਾ ਗੁਰੂ ਵੱਲੋਂ ਨਹੀਂ ਵੀ ਬਾਹਰੋਂ ਆਪਣੀ ਗੱਲ ਕਰ ਰਹੇ ਨੇ ਕੋਈ ਚੀਜ਼ ਫਿਰ ਰਹੀ ਹੈ ਨਾ ਬਾਹਰ ਜੀ ਨੂੰ ਪਤਾ ਨਹੀਂ ਹੈ। ਪਰੰਪਰਾਈ ਵਾਲੇ ਨਹੀਂ ਪਰ ਅਗੇ ਤਾਂ ਤਿਉ ਆ ਗਿਆ ਨਾ ਹਰ ਹਾਂ ਤਿਉ ਹਰ ਜਨ ਮੰਗੇ ਨਾਮ। ਉਹ ਤਾਂ ਜਿਹੜੇ ਬਾਹਰੋਂ ਫਿਰਦੇ ਨੇ ਬੂਦ ਜੜ ਪਿਆਸ ਉਹਨਾਂ ਨੂੰ ਵੀ ਹੈ ਪਿਆਸ ਇਹਨਾਂ ਨੂੰ ਵੀ ਹੈ ਉਹਨਾਂ ਨੂੰ ਗਿਆਨ ਨਹੀਂ ਕਿ ਬਾਹਰ ਮਿਲੂਗੀ ਨਹੀਂ ਮਿਲੂ ਉਹਨਾਂ ਨੂੰ ਗਲਤ ਦੱਸਿਆ ਹੋਇਆ ਹੈ ਠੀਕ ਹੈ ਪਰ ਉਹਨਾਂ ਦੇ ਮਨ 'ਚ ਇੱਛਾ ਹੈ ਇੱਛਾ ਵੀ ਤਾਂ ਫਿਰਦੇ ਨੇ ਉਹਨਾਂ ਨੂੰ ਪਤਾ ਕਿਹਾ ਹੋਇਆ ਹੈ ਉਹਨਾਂ ਦੇ ਪਰਮ ਭੁਲਾਈ ਠੀਕ ਵੀ ਹੈ ਕੋਈ ਹਾਂ ਜੇ ਕੋਈ ਇਹ ਸੋਚਦਾ ਹੋਵੇ ਵੀ ਆਪਣੇ ਨਾਲ ਜੋੜਦਾ ਹੈ ਨਾ ਦੂਜੇ ਨੂੰ ਤੋੜ ਕੇ ਇਹ ਆਲੀ ਹੈ ਠੀਕ ਹੈ ਵੀ ਮੈਂ ਤਾਂ ਆਪ ਸਤਗੁਰੂ ਤੋਂ ਪਾਇਆ ਤੁਸੀਂ ਵੀ ਪਾ ਲਓ ਹੈ ਹਾਂ ਫਾਂਜਨ ਸਾਰੇ ਜਿਹੜੇ ਨੇ ਉਹ ਆਪਣੇ ਅੰਦਰ ਇਹ ਨੂੰ ਮਰਦਾ ਹਾਲ ਦਾ ਬਾਹਰੋਂ ਦਿੱਕੇ ਸਨ ਪਾਇਆ ਬਾਹਰੋਂ ਮਿਲਦਾ ਹੁੰਦਾ ਬਾਹਰਲੇ ਦੱਸਦੇ ਜਰੂਰ ਹੁੰਦੇ ਨੇ ਬਾਹਰਲੇ ਕੀ ਕਹਿੰਦੇ ਬਾਹਰਲੇ ਪਰ ਹضور ਕਰਦੇ ਨੇ ਬਾਈ ਬਾਹਰੋਂ ਨਹੀਂ ਮਿਲਣਾ ਹੁੰਦਾ ਮਿਲ ਇੰਨੀ ਉਹ ਗੱਲ ਦੱਸਦੇ ਨੇ ਬਾਹਰਲੇ ਇਹ ਕਿ ਪਰ ਹੁਣ ਜਿਵੇਂ ਲਿਖਿਆ ਪੰਜਵੇਂ ਪਾਤਸ਼ਾਹ ਦਾ ਇਹ ਦਰਜ ਕੀਤਾ ਸ਼ਬਦ ਹੈ ਜੀ ਹਾਂ ਜੀ ਉਹ ਨਾਮ ਦੀ ਮੰਗ ਕਰ ਰਹੇ ਆ ਸਾਡੇ ਕੋਲ ਨਾਮ ਹੈ ਇਹ ਕਿਸ ਤਰ੍ਹਾਂ ਹੋ ਜਾਏਗਾ ਕਿ ਪੰਜਵੇਂ ਪਾਤਸ਼ਾਹ ਕੋਲ ਹੈ ਨਹੀਂ ਤੇ ਉਹਨਾਂ ਕੋਲ ਆ ਗਿਆ ਕਿਤੋਂ ਉਹ ਪੰਡਤਾਂ ਦੇ ਇਹ ਨਹੀਂ ਸੰਸਥਾਵਾਂ ਅਰਥ ਦੇ ਸੰਸਥਾਵਾਂ ਪਹਿਦਾ ਕਰਨ ਖਾਤਾ ਕਲੀਅਰ ਨਹੀਂ ਕੀਤੀ ਗੱਲ ਪੈਦਾ ਹੋ ਜਾਣਾ ਪੈਦਾ ਹੋ ਗਿਆ ਸੰਸਥਾਵਾਂ ਕਿ ਕਲੀਅਰ ਕੱਟ ਅਰਥ ਕਰਦੇ ਫੇਨੀ ਦੀ ਪੈਦਾ ਹੁੰਦੀਆਂ ਉਹ ਠੀਕ ਹੈ ਹੀ ਹੈ ਹਾਂ ਜੀ ਇਹ ਨਾਮ ਕੋਈ ਚੀਜ਼ ਹੈ ਜਿਹੜੀ ਸਤਗੁਰ ਤੋਂ ਪ੍ਰਾਪਤ ਹੋਣੀ ਹੈ ਸਾਨੂੰ ਹਾਂ ਜੀ ਬਿਲਕੁਲ ਤੇ ਇਹ ਕੋਈ ਅੱਖਰ ਨਹੀਂ ਵੀ ਵਾਹਿਗੁਰੂ ਨੂੰ ਆਪਾਂ ਕਹੀਏ ਨਾਮ ਹੈ ਉਹਨੂੰ ਜਾ ਕੇ ਰੱਟਿਏ ਇਹ ਗੱਲ ਨਹੀਂ ਹੈ ਜੀ ਇਹ ਨਹੀਂ ਹੈ ਪਰ ਇਹ ਨਰੀਜ਼ ਨੀਰ ਕੱਟ ਗੱਲ ਕਰਦੇ ਉੱਥੇ ਇਹੋ ਪਰਦਾ ਨਹੀਂ ਚੱਕਣਾ ਚਾਹੁੰਦਾ ਉਹ ਨੂੰ ਪਰਦੇ 'ਚ ਰੱਖਣੀ ਚਾਹੁੰਦਾ ਗੱਲ ਨੂੰ ਤਾਂ ਕਿ ਭਰਮ ਬਣਿਆ ਰਹੇ ਲੋਕਾਂ 'ਚ ਕਿਉਂਕਿ ਨਾਨਕ ਆਪ ਵੀ ਵਿਚੇ ਆ ਰਹੇ ਹਨ ਜੀ ਕਿਉਂ ਹਰ ਜਨ ਮੰਗੇ ਉਹ ਨਾਨਕ ਮੰਗੇ ਨਾਮ ਦਾੰਦ ਕਿਰਪਾ ਕਰੋ ਹੋਰੇ ਸਿੱਧੀ ਤਾਂ ਗੱਲ ਹੈ ਠੀਕ ਹੈ ਜੀ ਇੱਥੇ 11ਵੇਂ ਸਮਾਪਤੀ ਹੈ